ਸ਼ਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵਨਿਆ ਨਿਤ ਜਾਪੀਐ ਨਾਨਕ ਸਾਚਾ ਨਾਮ ਕਹੇ ਜੇ ਕਾਮ ਕ੍ਰੋਧ ਲੋਭ ਛੱਡ ਦਈਏ ਕਦੇ ਘਾਲੂ ਨਹੀਂ ਆਈਦਾ ਉੱਤੇ ਅਗਨ ਨਾਲ ਝਾੜ ਕੇ ਬਾਅਦ ਪੂਰੇ ਜਲ ਜਲਣਾ ਫਿਰ ਉਹਨਾਂ ਦਾ ਭਰੋਸਾ ਕਰਦੇ ਪਿੱਛੇ ਆ ਜਾਂਦੇ ਨੇ ਉਹ ਆ ਜਦੋਂ ਦੇ ਨਾਲੇ ਜਾਵੜੇ ਲਿਕੇ ਦੇ ਨਾਲੋਂ ਬੋਲੀ ਹੋ ਕੇ ਬੋਲੇ ਨਹੀਂ ਬੋਲਦਾ ਨਹੀਂ ਤੇ ਦੇ ਵਿੱਚ ਹੀ ਉਹਨਾਂ ਨੇ ਜਾਣੇ ਨਹੀਂ ਸੀ ਕਿ ਅੱਛਾ ਜੀ ਠੀਕ ਹੈ ਗੁਰਮ ਜਾਲ ਨੂੰ ਕਹਿੰਦੀ ਹੈ ਜੀ ਆਹ ਦਬਲਗ ਜਲਤੀ ਅਗਰ ਉਹ ਜਾਵੇ ਨਹੀਂ ਦਬਲਗ ਨਾਂਕ ਨਾਂਗਾ ਕਚਪਾਵੇਂ ਨਹੀਂ ਤਾਕੇ ਇਹ ਜਾਣਦੇ ਉਹਨਾਂ ਕੋਲ ਨਹੀਂ ਸੰਸਕਾਰ ਕਰਿਆ ਉਹਨੇ ਮੋੜ ਦਾ ਘਲੂ ਆ ਜੂਗਾ ਹੈ ਅੱਛਾ ਜੀ ਫੈਦ ਵੜ ਜਾਂਦਾ ਨੇ ਤੇ ਫੇਰ ਗਿਆਨ ਨਾਲ ਜਲਣਗੇ ਪ੍ਰਚੰਡ ਗਿਆਨ ਨਾਲ ਜਲਣਗੇ ਪ੍ਰਚੰਡਤਾ ਨਾਲ ਗਿਆਨ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਹੂੰ ਇਹਨਾਂ ਦੇ ਟਾਰਗੇਟ ਰੱਖੋ ਇਹਨਾਂ ਦੇ ਫਾਇਦੇਆਂ ਨੁਕਸਾਨ ਤੋਂ ਦੇਰਾਂ ਜਲ ਜਾਣਗੇ ਜਨਾ ਜਲਾ ਕੇ ਪਾ ਕੇ ਰੱਖੋ ਜਲਦਾ ਹੀ ਰਹਿੰਦਾ ਠੀਕ ਹੈ ਜੀ ਸ਼ੁੱਧ ਵੀ ਹੁੰਦਾ ਹੈ ਹਾਂਜੀ ਜੀਵਦੇ ਆ ਨਿਤ ਜਾਪੀਐ ਨਾਨਕ ਸੱਚਾ ਨਾਮ ਜੀਵਦੇ ਆ ਨਿਤ ਜਾਪੀਐ ਨਾਨਕ ਸੱਚਾ ਨਾਮ ਜੇਲਾ ਨਾਮ ਹੈ ਸੱਚਾ ਹਾਂਜੀ ਇਹ ਜਿਉਂਦੇ ਆ ਨੂੰ ਦਰਸ਼ਨ ਹੁੰਦਾ ਇਹਦਾ ਮਰੇ ਤੋਂ ਹੀ ਕਿਸਨ ਕਰੇ ਹੋਇਆ ਆਹ ਜੇ ਕਹੇ ਮਰ ਕੇ ਨਾਮ ਮਿਲ ਹੋ ਜਾਊਗਾ ਉੱਤੇ ਮਰਦੇ ਸਭ ਝੂਠੇ ਨੇ ਜੀਵ ਜੀਵਨ ਦਿੱਤ ਜਾਪੀਆ ਤੇ ਦਰਸ਼ਨ ਕਰਨਾ ਨੇ ਨੇ ਜੀਵਨ ਵਿੱਚ ਠੀਕ ਹੈ ਮਰਦ ਬਾਦ ਨਹੀਂ ਹੁੰਦਾ ਤੇ ਪਹਿਲਾਂ ਇਹੋ ਜਨਮ ਆ ਜਨਮ ਦੀ ਲੋੜ ਸੀ ਠੀਕ ਹੈ ਪਹਿਲਾਂ ਨਾ ਹੋ ਜਾਂਦਾ ਆਪੀਏ ਤਕੋ ਜਾਪੀਏ ਦਾ ਤੇ ਜਪੀਏ ਦੀ ਹੈ ਅੱਛਾ ਜੀ ਜਪਣਾ ਹੁੰਦਾ ਦਿਸ਼ਾ ਦਰਸ਼ਨ ਹੁੰਦਾ ਸਮਝਵਣੀ ਠੀਕ ਹੈ ਜੀ ਫਿਰ ਤੇ ਆ ਵੀ ਜਪਣਾ ਹੀ ਨਾਲ ਜਿਵੇਂ ਜਾਪ ਸਾਹਿਬ ਹੈ ਉਸ ਤਰ੍ਹਾਂ ਜਾਪੀ ਹੈ ਜਾਪ ਸਾਹਿਬ ਹੈ ਜੇ ਜਪਿਆ ਉਹ ਦੱਸੇ ਠੀਕ ਹੈ ਪਰ ਕੀ ਜੋ ਸਮਝਿਆ ਆਦ ਉਹਦਾ ਪਰਚਾ ਦਿੱਖਦਾ ਠੀਕ ਹੈ ਮੈਂ ਆ ਸਮਝਿਆ ਦੇ ਵਿੱਚੋਂ ਪਾਛਾਣੇ ਐਸੇ ਨਾ ਰੱਖੇ ਪਰਮੇਸ਼ਰ ਦੇ ਜਿਹੜੇ ਆ ਗੁਰੂ ਗੁਰੂ ਗ੍ਰੰਥ ਸਾਹਿਬ ਜਾਇਦੀ ਹੋਣ। ਕਨਜਾਪ ਸਾਹਿਬ ਨੂੰ ਜੋ ਜਪਿਆ ਉਹ ਠੀਕ ਹੈ ਜੀ। ਮਹੱਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ। ਨਾਨਕ ਨਾਮ ਅਰਾਧਿਆ ਗੁਰਪੂਰੇ ਦਇਆ ਮਿਲਾਏ। ਜਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ। ਹਾਂਜੀ। ਆ ਹਾਂਜੀ ਅਚਾਰੇ ਬਾਲ ਪਾਏ ਨੇ ਸਿਮਰ ਕੇ ਪਾਏ ਤੇ ਫੜੋ ਸੀ ਇਤਨੇ ਬਾਲ ਸੀ ਦਸਾ ਰਹੇ ਆ ਦੱਸ ਰਹੇ ਆ ਨਾਮ ਦੇ ਤੇ ਮਤ ਪ੍ਰਾਪ ਆਪਣਾ ਸਭ ਪਾਏ ਆ ਹੈ ਤੇ ਹਰੇਕ ਵਿੱਚ ਆਪਣਾ ਪ੍ਰਭ ਹੈਗਾ ਉਹਨੂੰ ਸਿਮਰਨਾ ਸਭ ਕੁਝ ਬਾਹ ਨਾਹੀ ਬਾਤ ਹੋਣ ਦੇ ਪ੍ਰਭ ਬਾਹ ਦਾ ਦੇਖੂਗਾ ਪ੍ਰਭ ਕੇ ਵਿੱਚ ਦੇਖੂਗਾ ਠੀਕ ਹੈ ਨਾਨਕ ਨਾਮ ਰਾਧਿਆ ਗੁਰਪੂਰੇ ਦੀਆ ਮਿਲਾਇ ਨਾਨਕ ਨਾਮ ਰਾਧਿਆ ਜਾਂ ਨਾਮ ਦੀ ਇਰਾਦਨਾ ਹੋਈ ਹਾਂਜੀ ਉਹ ਹਵਤੀ ਭੁੱਖ ਪੈਦਾ ਹੋਈ ਇਰਾਦਨਾ ਕੀਤੀ ਖੁਦ ਰੋਟੀ ਵੀ ਢੀਕੇ ਕਰਦੇ ਆ ਰੋਟੀ ਆਉਣ ਵਾਲੀ ਹੈ ਬਾਲ ਕੋ ਚਾਰਦਾ ਕੋਈ ਕੰਮ ਕਰਦਾ ਖੇਤ ਦੇ ਵਿੱਚ ਕਰਦਾ ਕਰਦਾ ਥੱਕ ਲਿਆ ਟਾਈਮ ਹੋ ਗਿਆ ਉਹ ਰੱਬ ਨਹੀਂ ਕਰਦਾ ਵੀ ਰੋਟੀ ਅੱਜ ਫੇਰ ਰੋਟੀ ਇਰਾਦਨਾ ਤਮ ਤੋਂ ਵੀ ਆਪਣਾ ਕਰ ਲਿਆ ਹਾਂਜੀ ਕਿਹੜਾ ਟੋਟਿਆ ਪਿਆ ਰਾਦਣਾ ਹੀ ਕਰਦਾ ਰੋਤੀ ਵੀ ਢੀਕੇ ਕਰ ਲਿਆ ਉਹ ਦੇਖ ਰਿਹਾ ਹਾਂਜੀ ਗੁਰਪੂਰੇ ਦੀਆ ਮਿਲਾਏ ਗੁਰਪੂਰੇ ਦੀਆ ਮਿਲਾਏ ਗੁਰਪੂਰੇ ਦੇ ਨਾਮ ਲੈ ਕੇ ਤੇਜਤਾ ਮਰਜੀ ਪੂਰਾ ਖਜਾਨਾ ਹੀ ਲਿਆਤਾ ਉਹ ਬਲੀਗਨਾਰੀ ਦਾ ਨਹੀਂ ਸੀ ਲੈਣਾ ਉਹ ਬਲੀਗਨਾਰੀ ਦੀ ਤਾਂ ਗੱਲ ਹੈ। ਦੇ ਤਲਾ ਪੀਰ ਛਗਲਾ ਜਿੰਦ ਛਗਣਾ ਮੁਰਤ। ਠੀਕ ਹੈ ਜੀ ਉਹ ਤਾਂ ਕਹਾਣੀ ਬਣਾਈ ਹੈ ਬਲੀਗਨਾਰੀ ਦੀ। ਪਰ ਪੂਰੇ ਇਲਾਕੇ ਦੇ ਤਬ ਦਾਦੇ ਨੂੰ ਲੈ ਛਗਲਾ ਜਿੰਨਾ ਕੋਈ ਲੈਂਦਾ ਸੀ। ਠੀਕ ਹੈ ਜੀ ਪੂਰੇ ਗੁਰਨੇ ਕਿਹਨੂੰ ਮਿਲਾਤਾ ਜੀ ਕੀ ਇਹੋ ਨਾਮ ਦੀ ਭੁਖੀ ਅੱਛਾ ਜੀ ਸਾਚੇ ਨਾਮ ਕੀ ਲੱਗਿਆ ਭੁਖ ਭੁਖ ਉਹਦਾ ਹੈ ਹਮਮ ਆਪਣੇ ਅੰਦਰੋਂ ਆਪੇ ਪੈਦਾ ਹੋਇਆ ਠੀਕ ਪੂਰੇ ਗੁਰੂ ਆ ਅੱਛਾ ਜੀ ਉਹ ਉਹਦਾ ਪੈਰ ਅੰਦਰ ਸੀ ਇੱਕ ਪੈਰ ਬਾਹਰ ਸੀ ਇਹ ਬਾਹਰ ਪੈਸਦੀ ਹੈ ਇਹਦਾ ਮਨ ਵਾਲਾ ਪੈਰ ਬਾਹਰ ਸੀ ਤੇ ਪੈਰ ਅੰਦਰ ਸੀ ਉਹ ਤੇ ਦਦਾ 2070 ਵੀ ਕਰ ਸਕਦਾ ਬਾਹਰ ਵੀ ਕਰ ਸਕਦਾ ਠੀਕ ਹੈ ਜੀ ਮਾਰ ਵਾਲਾ ਹਸਤਾ ਦਾ ਜਾਇ ਨਹੀਂ ਸਕਦਾ ਉਹ ਨੂੰ ਮਾਰਦਾ ਸੀ ਜਿਹਦਾ ਪਹਿਲਾਂ ਇੱਕ ਪਾਰੰਦ ਸੀ ਠੀਕ ਹੈ ਜੀ ਇਧਰੋਂ ਬੜਾਉਣਾ ਇਹਨੇ ਦੂਰ ਹੋ ਰਾਮਕਾਲ ਤੇ ਬਾਹਰ ਹੋਣਾ ਜੇ ਨੀਣਾ ਸਤਗੁਰ ਦਾ ਉਪਦੇਸ਼ ਸੁਣ ਲਿਆ ਉਹ ਸੰਸਾਰ ਤੋਂ ਮੁਕਤ ਹੋ ਗਿਆ ਬੜਾ ਸੌਖੀ ਗੱਲ ਹੈ ਠੀਕ ਹੈ ਸਾਰੇ ਸਿੱਖ ਮੁਕਤ ਹੋ ਗਏ ਕੀ ਸਾਰੇ ਸਿੱਖ ਮੁਕਤ ਹੋ ਗਏ ਜਿਹੜੇ ਦੋਸਾਰੇ ਵਜੇ ਉੱਠਦੇ ਨੇ ਮੁਕਤ ਹੋ ਗਿਆ ਕੋਈ ਉਹਨਾਂ ਜੋ ਗੁਰੂਆਂ ਨਾਲ ਜੁੜੇ ਹੋਏ ਹਨ ਗੁਰੂ ਦੇ ਉਪਦੇਸ਼ ਚੜੀਆਂ ਜੇ ਗੁਰੂ ਨੇ ਉਪਦੇਸ਼ਿਆ ਨਾ ਗੁਰੂ ਦਾ ਉਪਦੇਸ਼ ਉਹਨਾਂ ਨੇ ਸੁਣਿਆ ਨਹੀਂ ਜੀ ਸੁਣਿਆ ਤਾਂ ਬੰਦੇ ਆਂ ਪਹਿਲਾਂ ਤਾਂ ਸੁਣੇ ਨਹੀਂ ਦੀ ਜੇ ਸੁਣਿਆ ਤਾਂ ਬੰਦੇ ਨਹੀਂ ਦੀ ਜੇ ਮਾਰ ਲੈਂਦੇ ਤਾਂ ਮੁਕਤ ਹੋ ਜਾਂਦੇ ਅੱਜ ਇੱਕ ਆਦਮੀ ਬਾਹਰ ਗੜੀ ਕਰਕੇ ਕਹੇ ਮੈਂ ਮੁਕਤ ਹਾਂ ਜੇ ਨਹੀਂ ਮੁਕਤ ਸਾਰੇ ਬਰਾਦੀ ਦੀ 2:00 ਵਜੇ ਤੱਕ ਕਰਨ ਆਉਣ ਨੂੰ ਜਾਂਦੇ ਨੇ ਫੇਰ ਸੋਨੇ ਦੀ ਪਾਲ ਕੀ ਹੈ ਬੇਟਾ ਸੋਨੇ ਦੇ ਆਲ ਦੇ ਪਿੱਛੇ ਤੁਰੇ ਫਿਰਦੇ ਨੇ ਆਇਆ ਦੇ ਜੇ ਗੁਰੂ ਉਪਦੇਸ਼ ਦਿੱਤਾ ਦੇਵੇ ਜੀ ਨੂੰ ਸ਼ਰਤ ਪੂਰੀ ਲੱਗਦੀ ਸੇ ਮੁਕਤੇ ਸੰਸਾਰ ਦੇ ਗਰੂਪ ਦੇ ਝੂਠੀ ਹੈ ਤੁਸੀਂ ਸਾਰੇ ਭਰਤੀ ਜੇ ਮੁਕਤੇ ਦੀ ਹੋਵੇ ਯਾਦਾ ਹੀ ਕਿਹਨੇ ਬੋਲੇ ਪ੍ਰੇਮ ਨੂੰ ਸੇ ਬਾਣਾ ਖੜਬ ਵੇਖੀ ਠੀਕ ਹੈ ਗੁਰਬਾਣੀ ਤੋਂ ਪੜ੍ਹ ਕੇ ਵੇਖੋ ਕੀ ਕਹਿੰਦੀ ਹੈ ਉਸੋ ਸਜਾ ਨੇ ਤਾਈ ਪੱਟ ਚੜਦੀ ਜੀ ਸੁਪਨਿਓ ਮਾਇਆ ਦੇ ਮੂਹ ਤੇ ਬਣ ਠੀਕ ਹੈ ਜਿਸ ਗਈ ਬਲਾਏ ਮਿਟ ਜਾਂਦੇ ਸਿਆ ਇਹ ਤਾਂ ਬਲਾਅ ਚਲੀ ਗਈ ਕੀ ਸੀ ਕਲਪਨ ਬਲਾਏ ਸੀ ਆ ਮਾਇਆ ਨੂੰ ਦੇ ਦੇ ਕੇ ਬੋਲਣ ਨੂੰ ਮਜਬੂਰ ਹੈ ਬੋਲ ਬੋਲੀ ਜਾਂਦਾ ਕੋਨਾ ਕੋ ਭੱਗੀ ਜਾਂਦਾ ਹੈ ਬਲਾਏ ਹੈ ਇੱਕ ਹੋਰ ਹੈ ਉਹ ਅੱਛਾ ਜੀ ਉਹ ਕਮੀਰ ਕਹਿੰਦਾ ਕਹਿੰਦਾ ਕੂੜੀ ਪੱਲੀ ਬਲਾਏ ਹੂੰ ਹੂੰ ਕਮੀਰ ਜੇ ਕੁਝ ਜਾਣਿਆ ਨਹੀਂ ਇਹ ਕਹਦਾ ਜਿਹਨਾਂ ਨੇ ਕੁਝ ਨਹੀਂ ਨਾ ਜਾਣਿਆ ਸੰਸਾਰ ਚ ਕਾ ਸੁਖ ਦੀਨ ਵਿਆਹ ਆਜ ਨੂੰ ਬੜਾ ਗੋਲੀਆਂ ਖਾ ਕੇ ਖੋਦੇ ਨੇ ਇਹ ਖਬਰੀ ਕੀ ਖਾ ਕੇ ਖੋਦੇ 2:30 ਵਜੇ ਉੱਠ ਕੇ ਫਿਰ ਦੇ ਦੁੱਧ ਕਰ ਆਓ ਫਾਨਾ ਦੇ ਵਾਇਆ ਵਾਸਤੇ ਕਰਦੇ ਨੇ ਵਾਇਆ ਕੁਝ ਨਹੀਂ ਪ੍ਰਾਪਤੀ ਕੁਝ ਕੀ ਹੋਈ ਇਹ ਕਿ ਜਨ ਕੋਈ ਜਾਣਾ ਨਹੀਂ ਦਿਨ ਸੁਖੀ ਤੀਂਦ ਵੀ ਆਏ ਆਮੇ ਗੁਜਿਆ ਬੁਜਣਾ ਪੂਰੀ ਬੁਲਾਏ ਕਲਾਮ ਨੂੰ ਸਮਝਾ ਕੇ ਮੇਰੇ ਪੂਰੀ ਬੁਲਾਏ ਪੂਰੀ ਬੁਲਾ ਗੱਲ ਪੈ ਗਈ ਪੂਰੀ ਪਰਿ ਬੁਲਾਏ ਉਹ ਬੋਲਦਾ ਕਿ ਪੂਰੀ ਬੁਲਾਏ ਜਦ ਆਪਣੇ ਨਾਲ ਬੋਲਦਾ ਤਕਲੀ ਬੁਲਾਏ ਬੁਲਾ ਦੋ ਕੇ ਸੁਬਦੀ ਹੈ ਕਲਾ ਗੱਲ ਪੈ ਹੈ ਇਹਦੀ ਅਤਲੀ ਪੂਰੀ ਬਲਾਕ ਨਾਲ ਕੌਣੇ ਆ ਤਾਂ ਤਿੱਥੇ ਵੀ ਤੇ ਬੈਠਣਾ ਤੂੰ ਕਹੀਂ ਕਿ ਆਈ ਮਾਨਕਬੂਰ ਜਰ ਇੱਕ ਬਲਾਕ ਨੂੰ ਜਿਵੇਂ ਲੰਦਾ ਲੰਦਾ ਇਹ ਜੀ ਬੈਠਣਾ ਤੂੰ ਯਾਰ ਖਰੀਦੇ ਜਲਾ ਬਊਗਾ ਬਲਾ ਤੇਰੀ ਆਮਦਨ ਲੈ ਜੂਗੀ ਪਰ ਇਧਰ ਲਾ ਪਾਸਾ ਦੇਖ ਲੈ ਮਾਨਕਬੂਰ ਕਰਨਾ ਹੋਊਗਾ ਉਹ ਕਹਿੰਦਾ ਇਹ ਮਰਨਾ ਕਬੂਲ ਹੈ ਇੱਕ ਬਾਹਰ ਦਾ ਬੰਦਾ ਇਹ ਆਦਮਾਨ ਬਾਨ ਮਾਲਤੀ ਤੋ ਬਾਰ-ਬਾਰ ਮਨਵਾਉ ਤੈ ਕੋਲ ਮਰਨ ਜਦ ਤੋ ਜੀ ਗਈ ਬਲਾਏ ਸਾਰੇ ਜਗ ਦੂਰ ਹੋ ਗਏ ਠੀਕ ਦਰਸ਼ਨ ਦੇਖ ਜਗਤ ਨਿਹਾਲ ਹੋਏ ਚਨ ਕੇ ਸੰਗ ਨਿਹਾਲ ਪਾਪਾਂ ਮੈਲ ਧੋਏ ਤਿਸ ਕਾ ਦਰਸ਼ਨ ਦੇਖ ਇਹ ਬੱਦਦੇ ਦੀ ਗੱਲ ਹੈ ਅਲੱਗ ਹੈ ਪਰ ਜਗ ਜਗਤ ਨੂੰ ਨਿਹਾਲ ਹੋ ਜੇ ਤਕੀਦਾ ਹੀ ਕੇ ਜੰਤ ਦੇ ਹਾਲ ਹੋ ਜਾਂਦਾ ਬੇਤੋ ਕੋਈ ਨਾ ਠੀਕ ਹੈ ਉਹ ਬੰਦਾ ਜਿਹੜਾ ਹੁੰਦਾ ਗੁਰਮੁਖ ਉਹਦਾ ਤਾਂ ਦਰਸ਼ਨ ਤੇ ਕਿੰਵੀ ਜੰਤ ਦੇ ਹਾਲ ਹੋ ਜਾਂਦਾ ਠੀਕ ਆ ਤੇ ਹੋਇਆ ਉਹ ਤਾਂ ਤੁਰਿਆ ਜਾਂਦਾ ਹੋਵੇ ਸੜਕ ਤੇ ਦਰਸ਼ਨ ਕਰਕੇ ਵੀ ਜਹਾਲ ਹੋ ਜਾਂਦਾ ਬਾਰੇ ਬਿਰੋਧ ਕਾਲ ਬਿਰੋਧ ਰੋਪੋ ਉਹਦੇ ਹੁੰਦੇ ਹੀ ਆਪਣਾ ਨਾ ਕੋਈ ਬਗਾਨਾ ਹੁੰਦੇ ਹੀ ਉਹਦੀ ਜਿਹੜੀ ਅਨੰਦ ਦ੍ਰਿਸ਼ਟੀ ਹੈ ਉਹ ਤੋਂ ਹੀ ਦੇਖ ਕੇ ਬਦਲ ਕੇ ਰੱਖੀ ਫਰਕ ਤਾਂ ਦੇਖੀ ਤੇ ਹਾਂਜੀ ਜਨ ਕੇ ਸੰਗੀ ਨਿਹਾਲ ਪਾਪਾਂ ਮੈਲਤ ਹੋਈ ਜਨ ਕਾ ਸੰਗੀ ਨਰ ਕੀਤਾ ਹੋਇਆ ਉਹਨੇ ਆਪਣੇ ਨਾਲ ਜੰਮੂ ਨਾਲੇ ਨਾਲ ਨਹੀਂ ਕਰਦੇ ਤੀਤੋ ਤਾਰੀ ਦਾ ਇੱਕ ਵਾਰ ਉਹਨੇ ਕੱਪੜੇ ਕੋੜੇ ਪਾ ਗਏ ਨੂੰ ਧੋ ਕੇ ਸਮਾਰ ਕੇ ਕਿਤੇ ਲੈ ਕੇ ਜਾਣਾ ਹੋਵੇ ਫਿਰ ਉਹਨੂੰ ਧੋਦੀ ਚਾ ਕੋਈ ਰੱਖੇ ਠੀਕ ਹੈ ਕੀ ਬੋਤਾ ਆਲਗ ਕੇ ਜੱਪ ਕੇ ਨਾ ਹੀ ਚਾਹ ਉਹ ਕੋ ਅਗਲੇ ਆ ਕੇ ਕਪੜੇ ਫੇਰੀ ਲਈਦਾ ਹੋਂ ਨਾ ਚੱਗੀ ਦੱਸ ਉਹ ਥੰਦੇ ਤੋਂ ਦਈਗਾ ਐਨਾ ਤੂੰ ਬਸ ਯਾਥੇ ਬੈਠਾ ਰਹਿ ਤੂੰ ਬਿਠੇ ਰਹਿ ਗੇਲ ਖੇਲ ਕੇ ਹੂੰ ਕੇ ਸੰਗੀ ਨਿਹਾਲ ਪਾਪਾ ਮੈਲ ਧੋਏ ਪਾਪਾ ਮੈਲ ਧੋਏ ਪਾਪਾ ਦੀ ਮੈਲ ਧੋਤੀ ਹੋਈ ਹੈ ਨਿਹਾਲ ਤਾਂ ਸਾਬ ਹੈ ਜੀ ਪਾਪਾ ਮਾਂ ਤੋਂ ਮਤਲਬ ਹੈ ਤੁਹਾਰੇ ਪਦਾਰਥ ਦੀ ਇੱਛਾ ਹੀ ਨਹੀਂ ਕੋਈ ਜਦ ਤੁਹਾਨੂੰ ਉtreਜੇ ਬਿਜਾਰ ਦੀ ਕੋਈ ਚੀਜ਼ ਲੈਣੀ ਚਾਹੀ ਹੋਵੇ ਇੱਛਾ ਹੋਵੇ ਹੋਏ ਸੰਤੋਖ ਭੁੱਖਾਂ ਧਰਾਪੀ ਉਸ ਅਵਸਥਾ ਵਿੱਚ ਜਾ ਦੀ ਸੋਚੀ ਹੁੰਦੀ ਅਮਰ ਬਲਾਂ ਨਾਲ ਸੁਪਰ ਕੋ ਹੁੰਦਾ ਹੈ ਉਹ ਸੁਪਰ ਪ੍ਰਗਟ ਹੁੰਦਾ ਠੀਕ ਹੈ ਜਪਿਆ ਉੱਤੇ ਜਾ ਕੇ ਜਪਦਾ ਵੀ ਅਮਰ ਪਤਾ ਲੱਗਦਾ ਜਾ ਕੇ ਇਹ ਭੁੱਲਣ ਤੋਂ ਅੰਦਰ ਇਹ ਉਲ ਲੱਗੇ ਨਹੀਂ ਆਗਾ ਇਹ ਤਾਂ ਲੱਕੜੀ ਠੀਕ ਹੈ ਮਨ ਕੋ ਸੰਤੋਖ ਭੁੱਖਾ ਧਰਾਪੀ ਹੈ ਬਹੁਤ ਸੁਖ ਹੋ ਗਿਆ ਤੇ ਗਲਤ ਪੁੱੜ ਗਈ ਤੇ ਸੱਚ ਹੋ ਗਿਆ ਲੋਕਾ ਮੰਨਦੇ ਹੈ ਸਭ ਕੁਝ ਘਰ ਬਣਾ ਲੈਣਾਂ ਨੇ ਇਹ ਤਾਂ ਹੈ ਠੀਕ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ ਜਿਸ ਘਟ ਵਸਿਆ ਨਾਉ ਤਿਸ ਬੰਧੂ ਕਾਟੀਐ ਉਹ ਬੰਧਨ ਖੱਟੇ ਹਰ ਤਨ ਖਾਟੀ ਠੀਕ ਹੈ ਬੰਧਨ ਨੂੰ ਹਰ ਤਨ ਖਟਿਆ ਸਾਦਾ ਤਰੀਕਾ ਕਿਹਾ ਕਿ ਸੇਰੂ ਗੁਲਾਬ ਕਿਸੇ ਨਹੀਂ ਹੋਇਆ ਬੱਲੇ ਦਾ ਉਹ ਜੀ